श्लोक दृष्टंत एको सुनींत एको वर्तंत एको नरहर देचनते को सुनयनते को वरंत एको नरहर हण जैसा भी इथे आके कोई आसरी पौड़ी ते इकदे ना कोई दीना ही नहीं है सुनदा भी होई है ओसे दी गल सुनंगे एक दी सुनींत एको एको ही शब्द सुनदा है ओ ਕੰਨਾ ਨਾ ਸਮਝ ਲੈ ਨਹੀਂ ਲੈ ਸੁਣਨਾ ਹੋਰ ਕੀ ਹੈ ਬਿਨਾ ਕੰਨਾ ਤੇ ਸੁਣਨ ਤਾ ਹੁਣ ਬਿਨਾ ਕੰਨਾ ਨਾਲ ਕੰਨਾ ਨਾਲ ਕੋਈ ਸ਼ਬਦ ਸੁਣਗਾ ਕੋਈ ਹੁਕਮ ਹੈ ਤੇਰਾ ਨੇ ਜਿਹੜੇ ਨੇ ਮੌਲਨਾ ਕਬੂਲ ਕੀਤਾ ਉਹਨਾਂ ਨੂੰ ਹਰੇ ਕਰਦਾ ਗੁਰ ਆਪਾਂ ਪਰਦੇ ਨਰੂ ਮਰੇ ਨਰ ਕਾਮਨਾ ਆਵੇ ਉਹਦਾ ਵੀ ਇੱਥੇ ਕੋਈ ਭਾਵ ਬਣਦਾ ਨਰ ਹਰੇ ਉਹ ਵੀ ਨਰ ਦੀ ਗੱਲ ਹੋ ਰਹੀ ਹੈ ਹਾਂ ਨਾ ਨਰੂ ਮਰੇ ਨਰ ਦੇ ਕਾਮ ਨਹੀਂ ਹੁੰਦਾ ਨਰ ਦੇ ਕੀ ਕੰਮ ਹੋਰ ਮਰ ਗਿਆ ਕੰਮ ਦਾ ਰਿਹਾ ਨਾਲ ਰਹਿ ਗਿਆ ਹੁਣ ਬਸ ਮਨ ਦਾ ਭਰਮੀ ਮਰਿਆ ਹੋਰ ਕੀ ਮਰਿਆ ਜੇ ਲਹਿੜਾਂ ਮਰ ਗਈਆਂ ਆ ਲੈ ਦਾ ਕਾਰਨ ਕੰਮ ਆਇਆ ਪਾਣੀ ਕਮ ਆ ਗਿਆ ਪਾਣੀ ਦਾ ਪਾਣੀ ਜਿ ਸਮਾ ਗਿਆ ਇਹ ਤਾਂ ਠੀਕ ਹੈ ਲਹਿਰ ਦਾ ਕਾਰਨ ਜਿਹੜਾ ਸੀ ਨਾ ਹਵਾ ਉਹ ਨਹੀਂ ਕੰਮ ਆਇਆ ਪਾਣੀ ਚੋ ਦੇ ਪਾਣੀ ਲਗੀ ਪਸ਼ੂ ਕੋਣ ਸੀ ਉੱਥੇ ਪਸ਼ੂ ਮਰੇ ਪਸ਼ੂ ਸ਼ਰੀਰ ਸੀ ਹੈ ਇਹ ਕਰਕੇ ਤਾਂ ਅਸੀਂ ਪਸ਼ੂ ਹੀ ਆ ਜੇ ਸ਼ਰੀਰ ਨਾ ਜੜਿਆ ਜਿਹੜੇ ਸ਼ਰੀਰ ਨੂੰ ਸਮਝਦੇ ਨੇ ਮੈਂ ਉਹ ਪਸ਼ੂ ਹੈ ਪਸ਼ੂ ਟੋਰ ਬਿਨ ਪਸ਼ੂ ਟੋਰੇ ਨਾਮਦਾਨ ਜਾਚੰਤ ਨਾਨਕ ਦਇਆਲ ਪੁਰਖ ਕਿਰਪਾ ਕਰੇ ਨਾਮਦਾਨ ਜਾਂਚਣ ਜਿਹੜੇ ਨਾਮਦਾਨ ਮੰਗਦੇ ਨੇ ਨਾਮਦਾਨ ਦੀ ਜਾਂਚਣ ਕਰਦੇ ਨੇ ਨਾਮਦਾਨ ਦੇ ਜੱਜ ਕਰਦੇ ਨੇ ਨਾਮਦਾਨ ਹੀ ਦਾਨ ਮੰਗਦੇ ਨੇ ਮਾਨਕ ਦਿਆਲ ਉਰਖੇ ਕਰਪਾ ਕਰਾ ਉਹਨਾਂ ਤੇ ਹੀ ਦਿਆਲਪੁਰਖ ਕਿਰਪਾ ਕਰਦਾ ਉਹਨਾਂ ਨੂੰ ਨਾਮ ਮਿਲਦਾ ਬਾਕੀ ਜਿਹੜਾ ਸਮਾਨ ਮੰਗਦੇ ਆਪਾਂ ਉਹ ਤਾਂ ਆਪਣੀ ਮਰਜ਼ੀ ਨਾਲ ਦਵੇ ਨਾਮ ਜਰੂਰ ਦਿੰਦਾ ਜਿਹੜਾ ਨਾਮ ਮੰਗਦਾ ਉਹ ਦੇਖੋ ਜੇ ਮੈਂ ਰਾਜਾ ਬਣਨਾ ਕੋਈ ਜਿਉੜੀ ਗੱਲ ਨਹੀਂ ਬਣੀ ਨਹੀਂ ਮੰਗਦਾ ਦੇਖੋ ਕੰਮ ਤਾਂ ਇਹਦੇ ਕੋਈ ਜੁੜੀ ਗੱਲ ਨਹੀਂ ਦਵੇ ਉਹਦੀ ਮਰਜ਼ੀ ਦੇਵੇ ਦਵੇ ਸੇਵੀ ਇੱਕ ਸੰਮਲ ਹਰ ਇੱਕ ਅਰਦਾਸ ਨਾਮ ਵਖਰ ਧਨ ਨਾਨਕ ਸੱਚੀ ਰਾਸ ਇੱਕ ਸੇਵੀ ਇੱਕ ਸੇਵਾ ਕਰਨੀ ਚਾਹੀਦੀ ਹੈ ਆਪਣੇ ਆਪ ਦਸਨ ਵਾਲਾ ਹੋ ਸਕਦਾ ਇੱਕ ਹੋ ਕੇ ਸੰਮਲਦਾ ਐ ਨਹੀਂ ਡੋਲਦਾ ਇਕੋ ਵੀ ਕੋਦੇ ਨਾਲ ਜੁੜਦੀ ਇੱਕ ਵੀ ਸੇਵਾ ਚ ਸੰਭਲਿਆ ਨਾ ਨਹੀਂ ਤੇ ਡੋਲਦਾ ਰਹਿੰਦਾ ਹਰ ਇੱਕ ਸੁਭਾਅ ਅਰਦਾਸ ਉਹਦਾ ਹਰ ਇੱਕ ਹਰ ਉਹਦੇ ਉਹਦੇ ਅੱਗੇ ਹੋਇਆ ਹੋਇਆ ਸੰਭਲਿਆ ਹੋਇਆ ਜੇ ਦੋ ਤਾ ਹੋਇਆ ਫਿਰ ਡੋਲ ਫਿਰ ਨਹੀਂ ਸੰਭਲਦਾ ਸਾਜੀ ਨਾਮ ਵਖਰੇ ਤਾਨ ਇਹਨਾਂ ਦੇ ਨਾਮ ਬਖਰ ਤਾਂ ਕਥਾ ਕੀਤਾ ਬੰਦ ਕਰਨ ਉਹਨਾਂ ਕੋਲ ਸੱਚੀ ਰਾਸ ਹੈ ਬਾਕੀ ਸਭ ਝੂਠੀ ਰਾਸ ਹੈ ਸੰਸਾਰੀ ਤਾਂ ਸੰਸਾਰੀ ਗਿਆਨ ਵੀ ਝੂਠੀ ਰਾਸ ਹੈ ਆਤਮ ਗਿਆਨ ਕੇ ਬਿਨਾ ਕੋਈ ਸੱਚੀ ਰਾਸ ਨਹੀਂ ਬੇਅੰਤ ਪੂਰਣ ਇੱਕ ਇਹ ਸਭ ਕੁਝ ਆਪੇ ਆਪ ਦੂਜਾ ਕਹਾ ਕੇ ਪ੍ਰਭ ਦਿਆਲ ਬੇਅੰਤ ਪੂਰਣ ਇੱਕ ਜਿਹੜਾ ਹੈਗਾ ਕੋਈ ਪੂਰਣ ਉਹੀ ਪ੍ਰਭਾ ਉਹੀ ਧਿਆਲ ਹੈ। ਕੋਈ ਦਿਆ ਕਰੰਦੇ ਸਮਰੱਥ ਹਰ ਕੋਈ ਧਿਆਨ ਨਹੀਂ ਕਰ ਸਕਦਾ। ਜਿਹੜਾ ਇੱਕ ਨਹੀਂ ਹੈ ਉਹ ਧਿਆਕ ਮੈਂ ਸਰਦੂ ਕਿਸੇ ਤੇ ਉਹ ਤਾਂ ਆਪ ਇਹਨੂੰ ਸਮਰੱਥ ਹੈ। ਸਭ ਕੁਝ ਆਪੇ ਆਪ ਦੂਜਾ ਨਹੀਂ ਕੇ। ਸਭ ਕੁਝ ਆਪੇ ਆਪ ਦੂਜਾ ਨਹੀਂ ਕੇ ਸਭ ਕੁਝ ਆਪੇ ਆਪ ਦੂਜਾ ਨਹੀਂ ਕੋਈ ਦੂਜਾ ਦੂਜਾ ਮੰਨ ਕੇ ਖੇ ਮੰਨ ਮੰਨ ਕੁਛ ਨਹੀਂ ਹੈ। ਹੁਕਮੇ ਇੱਕ ਦਾ ਚੱਲਦਾ। ਇਤੇ ਵੀ ਚੱਲਦਾ ਚਾਹੇ ਉਹ ਬੰਦੀਆ ਆ ਜਾਣ ਦੁਨੀਆ ਵੀ ਲੋਕ ਨਹੀਂ ਜਾਣ ਰਾਣਾ ਪਰ ਉਹਨਾਂ ਵਿੱਚ ਉਹਨਾਂ ਦੇ ਕੋਈ ਥੁੜੀ ਨਹੀਂ ਹੈ ਇਹ ਭੂਪਤਨ ਸਭ ਦੇ ਵਿਚਾਰ ਰਾਜਾ ਨਹੀਂ ਕਰਦਾ ਚਾਹੇ ਇਹਨੂੰ ਕਹਾ ਕਿਹੇ ਕਹਾ ਕਹਾ ਹੈ ਕਹਾ ਲਵਜ਼ ਕਿੱਥੇ ਇੱਕ ਦੂਜਾ ਕੌਣ ਹੈ ਦੂਜਾ ਮੇਰੇ ਨਾਲ ਕਰੋ ਪ੍ਰਭ ਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨਹਿਚਲ ਤੁਧਿ ਥਿਓ ਆਪ ਕਰੋ ਪ੍ਰਭ ਦਾਨ ਆਪੇ ਆਪ ਲੈ ਆਪੇ ਦਾਨ ਕਰਦਾ ਆਪ ਹੀ ਆਪ ਸਾਥ ਦੋ ਤਾਂ ਆਇਆ ਹੈ ਦੂਜਾ ਨਹੀਂ ਹੈ ਇੱਕ ਦੋ ਤਾਂ ਆਇਆ ਹੋਇਆ ਅੱਛਾ ਦੂਜਾ ਜਾਦਾ ਸੀ ਦੋ ਵੀ ਕਹਿੰਦੇ ਆਪੇ ਹੀ ਆਪਣੇ ਆਪ ਨੂੰ ਆਪੇ ਸਮਝਾ ਰਿਹਾ ਆਪਣੇ ਆਪ ਮੰਨੂ ਸੀ ਆਪੇ ਸਮਝਾਉਣਾ ਦੂਜਾ ਕੌਣ ਹੈ ਆਪਣੇ ਮਨ ਨੂੰ ਆਪੇ ਸਮਝਾ ਰਿਹਾ ਤੇ ਦੂਜਾ ਕੌਣ ਜਿਹਦਾ ਮਨ ਹੈ ਉਹ ਕੋ ਤੋਂ ਵੱਖਰਾ ਹੈ ਇਹ ਚਿੱਟੀ ਦੂਰ ਕਰਨੀ ਔਰ ਕੁਝ ਨਹੀਂ ਹੈਗਾ ਇਹ ਚਿੱਟੀ ਹੀ ਦੂਰ ਕਰਨੀ ਆਪਣ ਜਾਣਾ ਹੁਕਮ ਆਬ ਨੇਟਲ ਸਥਿਓ ਹੁਣਾ ਜਾਣਾ ਤਾਂ ਹੁਕਮ ਹੈ ਬਾਕੀ ਤਾਂ ਉਹ ਕੌਣ ਹੈ ਉਹ ਦੇਚਲਾ ਇੱਕ ਦੇਚਲਾ ਹੁਕਮ ਨਾਲ ਆਉਣਾ ਜਾਣਾ ਜਮਾਨਾ ਹੋ ਦੂਜਾ ਫੇਰਾ ਉਹ ਫੇਰਾ ਤੇ ਉਹ ਦਾ ਫੇਰਾ ਕਿਰਪਾ ਕਰਕੇ ਮੈਨੂੰ ਨਾਮ ਦਿਓ ਹੋਰ ਮੈਂ ਕੁਝ ਡਿਮਾਂਡ ਨਹੀਂ ਮੇਰੀ ਹੋਰ ਕੁਝ ਨੋਟੇ ਦਿਨੋ ਤਾਂ ਨਾਮ ਤਾਂ ਵੀਰੇ ਸੰਕਿਆ ਉਹੀ ਸੱਚਾ ਧਰਨ ਉਹੀ ਨਾਲ ਚੱਲਣ ਵਾਲਾ ਉਹੀ ਨਾਲ ਰਹਿਣ ਵਾਲਾ ਉਹੀ ਕੰਮ ਆਉਣ ਵਾਲਾ ਜਾਂ ਪੈਣ ਦੇ ਮਹਾਂ ਅੰਦਗਵਾਰ ਹਰ ਨਾਮ ਸੰਗ ਹੋ ਨਾਮ ਤੇ ਨਾਲ ਪਛਾਣੂ ਜਿੱਤੇ ਨਾਲ ਜਾਣ ਵਾਲੀ ਚੀਜ਼ ਕਮਾਉਣ ਵਾਲੀ ਉਹ ਸਭ ਇੱਥੇ ਰਹਿਣ ਵਾਲਾ ਹਾਂਜੀ ਕੀ ਸਾਵਣ ਜਾਣਾ ਹੁਕਮ ਸਭ ਨਿਸ਼ਚਰ ਤੁਧ ਨਾਨਕ ਮੰਗੇ ਦਾਨ ਕਰੀ ਕਿਰਪਾ ਨਾਮ ਦੇਉ ਇੱਥੇ 20ਵੀਂ ਪੌੜੀ ਸਮਾਪਤੀ ਹੈ ਜੀ ਨਾਲੇ ਜੈਤਸ਼ਰੀ ਕੀ ਵਾਰ ਮਹੱਲਾ ਪੰਜਵਾਂ ਇਹਦੀ ਵੀ ਨਾਲੇ ਸਮਾਪਤੀ ਹੈ ਜੀ ਜੀ